साध के संग मुख उज्जवल संगी मल सगली संगी। है शुभी है, <coughs> है। संगी मुख उज्जवल हो मुख उज्जवल हो जे मन सजवे अपना जेड़ा बुद्धि दा नाल है बान संगीया नोदा जे साध है ਆ ਜਿਹੜੇ ਔਗਣਾ ਵੱਲ ਜਾਣ ਤੇ ਹਟ ਜਵੇ। ਬਕਾਰਾਂ ਦਾ ਖੜਾ ਛੜ ਦਵੇ। ਲੋਕ ਜਿਹਨੂੰ ਦੇਖੋ ਸਾਰੇ ਕੀ ਹੈ ਜਿਹੜੀ ਚੀਜ਼ ਨੂੰ ਅਸੀਂ ਬੁਰਾ ਕਹਿੰਦੇ ਆ ਉਹ ਤੋਂ ਪਨਾ ਬਚੋ। ਉਹਦੇ ਨੇੜੇ ਤਾਂ ਨਾ ਰਸੋ। ਜੇ ਲੋਕ ਬੁਰਾ ਹੈ ਉਹਦੇ ਦੂਰ ਹੋ। ਅੰਦਰ ਨਹੀਂ ਖੋਜ ਚਾਹੀਦਾ। ਜੇ ਕੋਈ ਬੁਰਾ ਤਾਂ ਅੰਦਰ ਨਹੀਂ ਪੜੋ ਚਾਹੀਦਾ ਫਿਰ। ਕਿਉਂਕਿ ਜੇ ਬਹੁਤ ਬੁਰਾ ਤਾਂ ਹਟੇ ਦਿੱਜਣਾ ਚਾਹੀਦਾ ਉਹਦੇ ਬਸਤੇ। ਜੇ ਮਨ ਸਦਿਆ ਹੋਇਆ ਹੈ ਤਾਂ ਹੀ ਪੋਸੀਬਲ ਹੈ ਕਿ ਅੰਦਰ ਦੁਬਾਰਾ ਉਹ ਨਾ ਆਵੇ ਨਹੀਂ ਤਾਂ ਫੇਰ ਆਇਆ ਉਹ ਜੇ ਮਨ ਮੋਹ ਤਿਆਗ ਕਰ ਦਵੇ ਤਾਂ ਹੈ ਜੇ ਮਨ ਮੋਹ ਦਾ ਕ੍ਰੋਧ ਦਾ ਲੋਭ ਦਾ ਤਿਆਗ ਨਹੀਂ ਨਾ ਕਰਦਾ ਫਿਰ ਪੋਸੀਬਲ ਨਹੀਂ ਹੈ ਅਜਿਹਾ ਸ਼ੁਧ ਹੋਈ ਇਸ ਕਰਕੇ ਸਾਧਾਂ ਦਾ ਬੰਦੂ ਪਿਆ ਫਿਰ ਸਾਧੀ ਹੋਦ ਕਰਨਾ ਮਨ ਸਾਧਨ ਆਹੋ جے ہتاں سنتے کدی جاؤ گے ایک پسا تا چار گانے لے کے دیتا پ اچھا اپنا کو بدلوا کچھ کالا کارے میں کرناں تو کلاں مڑے رہن صاحباں دے چار بندے تا کھولے کوئی برج لے پھردا کوئی کوئی خراب کرنے والے نے پھر تے اس پجت کرنے والے کلا صاحب کرنے والے کلا کناں جے صاحبوں ابھی ہٹ جوں گا وڑنا نہیں ਲੋਕ ਛੱਡ ਜਾਂਦੇ ਨੇ ਸਿਪਾਹੀ ਆ ਦੀ ਬੰਦਾ ਹੁਣ 68 ਜਾਂਦੇ ਨੇ ਮੰਨਦੇ ਸਭਲੇ ਲੋਕ ਹੁਣ 68 ਨੇ ਲੋਕਾਂ ਦੇ ਸਾਰਿਆਂ ਦੇ ਜਿਹੜੇ ਵੱਡੇ ਵੱਡੇ ਸੰਤ ਨੇ ਚੱਲੇ ਤੇ ਹਰ ਮਨ ਨੂੰ ਛੱਡ ਕੇ ਬਹਿ ਗਏ ਇਹਦੇ ਇਹ ਤਾਲਾ ਖੁੱਲਦਾ ਹੀ ਨਹੀਂ ਹਾਂ ਤਾਲਾ ਜਿਹੜਾ ਲੱਗਿਆ ਹੋਇਆ ਤਾਲਾ ਹੀ ਨਹੀਂ ਖੁੱਲਦਾ ਪਹਿਲਾਂ ਤਾਂ ਚਾਬੀ ਵਾਲੀ ਜਗ੍ਹਾ ਦਾ ਇਹ ਵੀ ਪਤਾ ਕਿ ਲੱਗਦੀ ਇਹਦੇ ਚਾਬੀ ਦਾ ਹੀ ਨਹੀਂ ਪਤਾ ਕਹੀ ਹੈ ਜਾਂ ਦੇ ਚ ਅ ਵੀ ਲੱਗਦੀ ਐ ਤਾਲੇ ਦਾ ਮੂੰਹ ਕਿਤੇ ਬਣਿਆ ਹੋਇਆ ਐ ਜੀ ਇਹਦਾ ਪੱਥਰ ਦਾ ਇਦਾਂ ਲੋਇਲਾ ਹੈ ਦਾ ਨਹੀਂ ਹੋਈ ਜੀ ਸਾਧ ਕੇ ਸੰਗੀ ਲੋਕ ਉਹ ਬੱਚੇ ਕੋ ਬਾਤ ਨਹੀਂ ਕਹਿੰਦੇ ਨੇ ਬਾਜ਼ਾਰ ਕਪਾਟ ਇਹ ਬੱਚਾ ਪੱਥਰ ਦਾ ਕਹਿੰਦੇ ਨੇ ਬਾਜ਼ਾਰ ਸੀਨੇ ਸੰਦੀ ਸਾਦ ਲਿਆ ਉਹਨੇ ਮਲਕ ਹੋਈਆ ਸਾਰੀ ਅੰਦਰਲੀ ਅੰਦਰਲੀ ਮਲਕ ਹੋਈਉ ਨਹੀਂ ਆਂਦੀ ਨਹੀਂ ਉਹਦਾ ਕੋ ਡਿਮਾਂਡ ਆਦਾ ਕੋਈ ਕਿਰਿਆ ਲੱਗ ਜੰਦੀ ਹੈ ਸਿੱਧੀ ਹੋਏ ਉੱਪਰ ਦੇਣਾ ਕੀ ਇਹ ਜਨਾ ਲੱਗਿਆ ਹੈ ਬਹੁਤ ਜਨਾ ਸਾਹ ਜਨਾ ਕੀ ਲਗਿਆ ਸਾਹ ਜਨਾ ਕੀ ਅਚਾਰੀ ਨੂੰ ਦੀ ਕਸਮ ਖੀਤੀ ਹੋਈ ਹੈ ਸਾਹ ਉਹਨਾਂ ਨੇ ਕਹਿੰਦਾ ਜੀ ਨੀਰ ਮਨਸਾਦ ਲੈ ਉਹਦਾ ਜੀ ਨੀਰ ਮਨਸਾਦ ਲੈ ਉਹ ਹੀ ਤਾਂ ਸਾਦਾ ਉਹਨੇ ਇਹੀ ਦੱਸਿਆ ਮੈਂ ਮੰਨ ਕੇ ਬੈਠਾ ਸਾਦੇ ਆਹੀ ਦਾ ਗੱਲ ਕੀਤੀ ਹੋਰ ਉਹਨੂੰ ਜੀਤਿਆ ਮੇਰੇ ਬਵਾਲੀ ਕਹਿੰਦਾ ਯਾਹੀ ਆਦਮ ਤਾ થઈ ਤੀਤੀ ਔਰ ਗੋਹੀ ਜੀਤਾ ਆਦਮ ਤਾ ਜਾਦੂ ਗਿਆਨ ਰੂਦਰਾ ਵਾਦੂ ਕਥਾ ਜਾਦੂ ਗਿਆਨ ਹੋਊਗਾ ਆਦਮ ਕਾ ਧੌਲੀ ਅਪੜੇ ਦੀ ਹਿਸਟਰੀ ਵੀ ਵਿੱਚੇ ਆ ਉਹਦੇ 100 ਬੋਲੇ ਜੋ ਵੇਖਿਆ ਉਦੋਂ ਜੋ ਦੇਖ ਰਹੇ ਨੇ ਕਹਿ ਰਹੇ ਜੋ ਦੇਖ ਰਹੇ ਨੇ ਉਹੀ ਉਸ ਵੇਲੇ ਦਾ ਇਤਿਹਾਸ ਹੈ ਜੋ ਉਸ ਵੇਲੇ ਦੇਖ ਕੇ ਕਹਿ ਰਹੇ ਨੇ ਉਹੀ ਤਾਂ ਉਸ ਵੇਲੇ ਦਾ ਇਤਿਹਾਸ ਹੈ ਹਾਂਜੀ ਸਾਧਕੇ ਸੇਲਾਪਾ ਬਹੁਤ ਬਿਆਦਲੋਂ ਕਹੀ ਹੋਊਗੀ ਕਿਉਂਕਿ ਜੋ ਦੇਖ ਰਹੇ ਨੇ ਉਹ ਉਹਦੇ ਵਾਂਗ ਅਸਰ ਹੈ ਦੇ ਜਿਹਨੂੰ ਦੇਖ ਰਹੇ ਆਉਂਗਾਗੇ ਹਾਂ ਸਾਧਕੇ ਸੰਗੀ ਮਿਟੇ ਅਭਿਮਾਨ ਸਾਧਕ ਜੇ ਮਨ ਨੂੰ ਸਾਧ ਲਈਏ ਤਾਂ ਹੰਕਾਰ ਵੱਡਦਾ ਨਹੀਂ ਹੰਕਾਰ ਨਹੀਂ ਵੱਡਦਾ ਅਭਿਮਾਨ ਤਾਂ ਵੱਡਦਾ ਵਰਤਿਆ ਜਾਵੇ ਤਾਂ ਕਾਲੂ ਮੇਰਾ ਕੈ ਲੱਭ ਜਾਂਦਾ ਉਹਦੇ ਕੱਤੇ ਨੂੰ ਗਲਾਵਾ ਕਿਵੇਂ ਕਿਵੇਂ ਬੜਦਾ ਪਿੱਛੇ ਪਤਾ ਕੀ ਆਇਆ ਸੀ ਪਿੱਛੇ ਆਇਆ ਸੀ ਕੰਮ ਕਰੋ ਦਾ ਲੋਭ ਹੋ ਦਿਰਸ ਜਾਇਆ ਹਮੇਬ ਦਿਰਸ ਦਾ ਪਿੱਛੇ ਜੇ ਮਨਸਾਹ ਦੇ 4 ਮਿੰਟ ਦੇ ਤਾਂੋਂ ਵਿੜਦਾ ਪੰਜਵਾਹ ਇਹਦਾ ਮਤਲਬ ਉਹੀ ਗੱਲ ਲੜੀ ਉੱਥੇ ਰਹੀ ਸੀ ਫਰਕ ਨਹੀਂ ਹੈ ਸੋ ਲੋ ਔਖਾ ਥੋਲੇ ਬਲਣਾ ਬਹੁਤ ਬਹੁਤ ਉਦੋਂ ਗਿਆ ਸੀ ਚਾਰਾ ਇਸ ਨਾ ਢੀਤੇ ਚਾਰ ਹੁੰਦੇ ਸੀ ਉਹਦਾ ਰੋਹ ਉਹ ਚਾਰ ਇਹਦੇ ਨੇ ਸਰਕਾਰ ਉਹਨੇ ਹੋਰ ਤਾਂ ਛੱਡਣੀਆਂ ਜਦ ਮਨ ਹਥਿਆਰ ਛੱਡੂਗਾ ਜਿੰਨਾ ਜਰ ਮਨ ਹਥਿਆਰ ਨਹੀਂ ਛੱਡਦਾ ਉਹ ਉਹ ਬਾਤ ਹੀ ਜਾਂਦੀ ਪਹਿਲਾਂ ਮੱਤੇ ਬਨਣਾ ਆਹ ਗੱਲ ਲੈ ਤੇ ਉਹਦੇ ਹੋਏ ਤੇ ਹੈ ਹੀ ਨਹੀਂ ਮੈਂ ਛੱਡਣੀ ਹੋਣੀ ਹੋਂ ਹੈ ਹੀ ਉਹਦੇ ਚ ਹੋਜ ਐ ਉਹਨੇ ਛੱਡਿਆ ਉਹ ਮੈਂ ਨਾ ਗੱਲ ਆ ਮੈਂ ਨਾ ਮੰਨੂ ਆਏ ਦੇਖੋ ਜਿਹੜੀ ਚੀਜ਼ ਬਾਅਦ ਚ ਪੈਦਾ ਹੋਈ ਪਹਿਲਾਂ ਮਰੂਗੀ ਉਹ ਪਹਿਲਾਂ ਮਰੂਗੀ ਸੋ ਪੈਨਸਾ ਪੈਦਾ ਉਹ ਇਹ ਤਾਂ ਪੈਦਾ ਕਦੇ ਉਹ ਤਾਂ ਪੈਦਾ ਹੀ ਨਹੀਂ ਹੋਇਆ ਕਦੇ ਪਹਿਲਾਂ ਤੇ ਹੀ ਦਾ ਇੱਕ ਰੂਪ ਰੂਪਾ ਮੇਰਾ ਜਨਮ ਘੁੱਟ ਲੰਤਾ ਨਾ ਮੇਰਾ ਕਰਮ ਘੁੱਟ ਲੰਤਾ ਜਨਮ ਘੁਪਾਤੀ ਇੱਕ ਘੁਪਾਤੀ ਜਨਮ ਵਾਲਾ ਤਾਂ ਨੇ ਚਾਰੇ ਚ ਕਰਮ ਘੁੱਟ ਲੰਤਾ ਕਰਮ ਘੁੱਟ ਚਾਰੇ ਆਪ ਘੁੱਟ ਹੀ ਹੈ ਹੀ ਘੁੱਟ ਲੰਤਾ ਚਾਰੇ ਆਪ ਆਪਾ ਕਹਨਦਾ ਵੀ ਆ ਅਜਿਹੇ ਐਫਗਾਨਾ ਦੇ ਬੰਦੇ ਨੇ ਅੱਫਲ ਜੇ ਰਾਹੀ ਹੋਵੇ ਐਂਦੇ ਕੋਈ ਹੋਦਾ ਨਾ ਚਾਹ ਮੇਰੇ ਠਈ ਪੰਜ ਦੋਸਰ ਆਵਾਜ਼ ਆ ਹਾਂ ਜੀ ਤੇ ਰਗਾਂ ਹਾਂ ਹਾਂ ਜੀ ਸਾਧਕੇ ਸੰਗੀ ਗਿਆਨ ਸਾਥ ਕਾ ਸੰਗੀ ਜਿੱਦਣ ਮਨ ਸੱਧ ਗਿਆ ਉਦਾਂ ਅੰਦਰੋਂ ਗਿਆਨ ਪ੍ਰਗਟ ਹੋ ਜਾਣਾ ਉਦੋਂ ਗਿਆਨ ਸ੍ਰੇਸ਼ ਗਿਆਨ ਉਦੋਂ ਉਹ ਪ੍ਰਗਟ ਹੁੰਦਾ ਪ੍ਰਗਟ ਕਿਉਂ ਵੀ ਹੁੰਦਾ ਪਰ ਗਰਗਾ ਹੁੜਵੀ ਹੈ। ਅੰਬਰ ਤਾਂ ਹੁੜਵੀ ਬਖਸਦਾ। ਪਰ ਬੁੱਝੇ ਬੁੱਝਣ ਹਾਰ। ਉਹ ਆਵਾਜ਼ ਤਾਂ ਹੁੜਵੀ ਆਉਂਦੀ ਆ ਪਰ ਆਵਾਜ਼ ਉਹ ਇੰਨੀ ਹਲਕੀ ਆ ਸੱਤ ਨੂੰ ਪਤਾ ਨਹੀਂ ਆਵਾਜ਼ ਹੈ। ਸ਼ੋਰ ਬਹੁਤ ਹੁੰਦਾ ਘੜੀ ਦੀ ਟਿਕ ਟਿਕ ਆਦ ਨੂੰ ਸੁਣ ਜਾਂਦੀ ਇਹਦੇ ਨੂੰ ਨਹੀਂ ਸੁਣਦੀ। ਕਿਉਂ ਬਈ? ਸ਼ੋਰ ਨਾਲ। ਬਾਹਰ। ਉਹ ਰਾਜਮਾਲ ਮੰਝੋ ਰਣ ਜਿਹੜਾ ਮੰਦਪਾਇਆ ਹੋਇਆ ਉਹਦੇ ਕਰਕੇ ਉਹ ਸੁਣਦੀ ਨਹੀਂ ਜੰਦੀ ਨਾਂ ਦਾ ਧਿਆਨ ਹੈ ਤਾਂ ਤਾਂ ਕੰਨਾ ਕੌਣ ਸੁਣਦਾ ਕੌਣ ਬੋਲਦਾ ਕੀ ਕਹਿੰਦਾ ਹੀ ਨਹੀਂ ਉਹਦਾ ਧਿਆਨ ਹੀ ਤੇ ਧਿਆਨ ਸਾਧਕੇ ਸੰਗੀ ਗੁੱਜੇ ਸਭ ਨੇ ਮਨ ਸਾਝੂਗਾ ਫਿਰ ਸਭ ਰੇੜੇ ਹੀ ਆ ਕੋਈ ਬਗਾਨਾ ਨਹੀਂ ਫਿਰ ਆਏਗਾ ਸਾਰ ਨਾਲੇ ਨੇੜਤਾ ਫਿਰ ਕੇ ਸਗੀ 부ਜੇ ਜੇ ਪ੍ਰਭ ਦੇੜੇ ਹੈ ਉਹ ਜਿਹੜਾ ਅੰਦਰ ਹੈ ਅੰਦਰ ਵਾਲਾ ਜਿਹੜਾ ਪ੍ਰਭ ਆਪ ਨੂੰ ਮੁਝ ਲੰਦਾ ਨੇੜੇ ਵਾਲੇ ਆਪਾਂ ਕਹਿੰਦੇ ਹਰ ਜਗ੍ਹਾ ਹੈ ਉਸ ਤੋਂ ਥੋੜੇ ਹੋਂ ਪਹਿਲਾਂ ਚੱਲਦੀ ਸੀ ਗੱਲ ਵੀ ਸਵਾਲ ਕੀਤਾ ਗਿਆ ਸੀ ਵੀ ਰੱਬ ਕਿੱਥੇ ਹੈ ਕਹਿੰਦਾ ਸਵਾਲ ਹੈ ਗੱਲ ਤੇਰਾ ਕਹਿੰਦਾ ਕਿਉਂ ਕਹਿੰਦਾ ਤੂੰ ਦੱਸ ਕਿੱਥੇ ਹੈ ਦੀ ਤੇ ਮਾਦਨ ਵਸੂ ਇਹ ਤੇ ਹੈ ਕਿ ਨਹੀਂ ਹੈ ਤੂੰ ਦੱਸ ਕਿ ਤੇ ਹੈ ਜੀ ਦੁਨੀਆ ਮੰਦੀਏ ਸਰਪਿਆ ਹਰ ਜਗ੍ਹਾ ਹੋ ਤੂੰ ਇਹ ਤਾਂ ਜਲ ਕਣ ਕਣ ਵੀ ਕਹਿ ਜਾਂਦੇ ਹੋ ਭਗਵਾਨ ਤੂੰ ਤਾਂ ਹੋਰ ਫਸ ਕੇ ਗੱਲ ਕਹਿ ਕੇ ਹੋਰ ਫਸ ਕੇ ਗੱਲ ਕਹਿ ਕੇ ਕਣ ਕਣ ਜੈ ਸਬੂਤ ਅਗਰ ਹਰ ਜਗ੍ਹਾ ਹੈ ਤੇ ਦਗਾੜ ਗੜ ਜੀ ਜਨੇ ਤਾਂ ਕਣ ਚ ਹੋਰ ਵੀ ਜਗ੍ਹਾ ਕਹਿਨੇ ਰੇ ਜਿਆਦਾ ਸਾਡੇ ਲੋਕ ਉਹ ਕਿਵੇਂ ਕਹਦੋਂਗੇ ਉਹ ਹੁਣ ਕੰਨ ਕੰਨ ਜਾ ਜਿਹੜਾ ਹੁਣ ਪਤਾ ਲੱਗਿਆ ਕੀ ਹੈ ਜਾਂ ਮਨ ਸਾਧਿਆ ਗਿਆ ਲੋਭ ਛੜਤਾ మోਹ ਛੜਤਾ ਇਹਦੇ ਕ੍ਰੋਧ ਛੜਤਾ ਉਹ ਫੇਰ ਕਹਿੰਦੇ ਪਤਾ ਲੱਗੂਗਾ ਉਹਦਾ 부ਝਿਦੂ ਹੈ 부ਝਿਆ ਜੂ ਪਰ ਆਚਾਰੇ ਜੀ ਜਦ ਛੱਡ ਕੇ ਬਾਚ ਹੋ ਜੇ ਅੱਪਾ ਜੀ ਆ ਗੱਲੇ ਨਹੀਂ ਸਮਝ ਆਉਂਦੀ ਛੱਡੇ ਬਿਨਾਂ ਉਹ ਛੱਡੇ ਬਿਨਾਂ ਗੱਲੇ ਨਹੀਂ ਸਮਝ ਆਉੜੀ ਹੈ ਸਾਧਕੇ ਸੰਗੀ 부ਝੇ ਪ੍ਰਭੂ ਨੇਰਾ ਹਾਂ ਮਨੁਜਾ ਹੀ ਕਿਸੇ ਤੇ ਜਿਨ ਨੇਰਾ ਕੁਦੇਰਾ ਮੈਂ ਦੱਸ ਤਪ ਤੋਂ ਦੂਰ ਕਿੱਤੀ ਦੂਰ ਹੈ ਦੱਸੋ ਆ ਲਾਈਟ ਤੋਂ ਟਿਊਬ ਕਿੰਨੀ ਦੂਰ ਹੈ ਦੱਸੋ ਕਾਇ ਤੁ ਵੀ ਰਾਤ ਪੇ ਦੇ ਦੇ ਕਹਿੰਦੇ ਨਾ ਉਹ ਇਧਰ ਵਰਕਾ ਕਾਰੋਂ ਬ੍ਰਿਕਦਲ ਕਰੇਗਾ ਇਹ ਤਾਂ ਹੱਥ ਪੇ ਦੇ ਲਈ ਆ ਯਾਹੀ ਦੂਨ ਹਾਂ ਦੇਖ ਲੋ ਦੱਸੋ ਕਰਨਾ ਵਰਕਾ ਉਹ ਤੋਂ ਤਾਂ ਚੀ ਹੈ ਯਾਹੀ ਦੇ ਚੀ ਰੁਹੀ ਚੀ फेड पैदा हो गया बड़ा दाना से बीज किथे गया किथे कम किथे गया पत्ते गए नहीं जड़ गए नहीं सब जगह को कह तू दस किथे नहीं बीज और मैं कहंगा पर तू दस बीज किथे दी बीज नहीं मिले चीज किथों आई है वाला चाहे छलकाया आया किथों फिर बीते बीते बीजों का पैदा नहीं होया ਜੇ ਬੀਜ ਚ ਪੈਦਾ ਆ ਬੀਜ ਦੇ ਵਿੱਚ ਹੀ ਹੋਵੇ ਉਹ ਚ ਹੀ ਬੜਿਆ ਹੈ ਰੂਪ ਲੈ ਬੀਜ ਦਾ ਰੂਪ ਜ਼ਰੂਰ ਬਦਲੇਗਾ ਹਾਂਜੀ ਸਾਧ ਸੰਗੀ ਸਭ ਹੋਦ ਨਵੇੜਾ ਸਾਧ ਦੇਖੋ ਇੱਥੇ ਸੰਗੀ ਆ ਗਿਆ ਸਾਧ ਇਹ ਹੈ ਜਿਹੜਾ ਸਾਧ ਦੀ ਸੰਗਤ ਕਰਦਾ ਰਹੇ ਦੋ ਆਥਰ ਨੂੰ ਇੱਥੇ ਇਸ ਦਾ ਸਾਥ ਸੰਗੀ ਸੰਗੀ ਨੂੰ ਸਾਥ ਕੇ ਦੇਖ ਲੈ ਇਹ ਅਰਥ ਨਹੀਂ ਬਣਦਾ ਹੋਤ ਨੂੰ ਬੇੜਾ ਲਿਆ ਤਾਂ ਸ਼ਰਤ ਨਹੀਂ ਆਈ ਜੇ ਸਾਥ ਸੰਗੀ ਨੂੰ ਨਾਲ ਸਾ ਲੋਟ ਫਿਰ ਵਿੱਚ ਸ਼ਰਤ ਔੜੀ ਕਿਤੇ ਸੰਗੀ ਸਭ ਹੋਤ ਨੂੰ ਬੇੜਾ ਸਾਧ ਜੇ ਕੋਈ ਸਾਥ ਹੋਵੇ ਉਹਦੀ ਸੰਗਤ ਕਰਨ ਨਾਲ ਨਵੇੜਾ ਹੋ ਜਾਂਦਾ ਤੂੰ ਆਪੇ ਛੱਡ ਦੇਂਗਾ ਉਹ ਛੜਵਾ ਦੂਗਾ ਤੇ ਤੇ ਤੇ ਕਰਕੇ ਛੜਵਾ ਦੂਗਾ ਤੈਨੂੰ ਰਾਹ ਦੱਸ ਦੂਗਾ ਜਿਆਦਾ ਨੂੰ ਛੇਤੀ ਸਭ ਨਵੇੜਾ ਹੋ ਜੂ ਤੇਰਾ ਜਿਹੜਾ ਪੁੰਨ ਪਾਪ ਲੈਣ ਦੇਣ ਦਾ ਤੂੰ ਕਹਿਣਾ ਇਹ ਖੁਸ਼ ਦੇ ਪਾਪ ਨੇ ਸਭ ਨੂੰ ਨਵੇੜਾ ਲੇਖਾ ਜੋ ਕਰ ਠੀਕ ਹੋ ਤੂੰ ਉਹਦੀ ਸੰਗਤ ਤਾਂ ਕਰ ਸਮਝਾਊਗਾ ਤਾਂ ਹੀ ਨਵੇੜਾ ਹੋਊਗਾ ਉਹ ਗਿਆਨ ਨਾਲ ਮਿਲਣਾ ਹੋਣਾ ਹੈ ਸਾਦੇ ਸੰਗਤ ਨਾਲ ਗਿਆਨ ਮਿਲੂਗਾ ਇਹ ਗੱਲ ਹੈ ਸੱਦੀ ਸਦੂਗਾ ਇਹ ਸੰਤਤ ਨਾਲ ਸੰਗਤ ਨਾਲ ਮਨ ਸਦੂਗਾ ਦਵੇੜਾ ਹੋ ਜੂਗਾ ਜਾਂਦੀ ਮਨ ਦਵੇੜਾ ਕੀ ਕਿਸੇ ਹੋਰ ਸਾਧੂ ਦੀ ਸੰਗਤ ਕਰਕੇ ਬਰ ਸੱਜੂਗਾ ਦਵੇੜਾ ਹੋ ਜੂ ਸੱਜਾ ਮਨ ਦਾ ਸਾਧਾ ਨਾਲ ਦਵੇੜਾ ਹੋ ਔਰ ਸਾਧ ਜਾਊਗਾ ਜਿਵੇਂ ਉਹ ਵੱਲ ਲਿੜ ਬੜ ਜੂ ਹਾਂਜੀ ਸਾਧ ਕੇ ਸੰਗੀ ਪਾਇ ਨਾਮ ਰਤਨ ਪਾਇ ਨਾਮ नाम ਨਾਮ ਰਤਨ ਆਦਿ ਉੱਥੇ ਹੀ ਆਦਿ ਸਾਧ ਦੀ ਸੰਗਤ ਵਿੱਚੋਂ ਨਾਮ ਰਤਨ ਦੀ ਪ੍ਰਾਪਤੀ ਹੈ ਸੰਗੀ ਨੂੰ ਸਾਧ ਕੇ ਆਪਣਾ ਸਦੀ ਤੋਂ ਸਾਧੋਂ ਤੋਂ ਤਾਂ ਪਹਿਲਾਂ ਉਹ ਗਿਆਨ ਵਾਲੇ ਮਨ ਨੂੰ ਕਿਹੋ ਸਾਧਨ ਹੈ ਇਹ ਇਸ ਕਰਕੇ ਗਿਆਨ ਦੇਣ ਵਾਲੇ ਦੀ ਗੱਲ ਆ ਰਹੀ ਹੈ ਸੰਗ ਸਿੱਖਾਂ ਦੀ ਜਿਹੜਾ ਲੋਟ ਆ ਜਾਂਦੀ ਹੈ ਜਿਵੇਂ ਪੰਜਵੇਂ ਪਾਤਸ਼ਾਹ ਉਸ ਵਕਤ ਸਾਧ ਅੰਗ ਸਾਧਿਆ ਹੈ ਮਾਨ ਹੈ ਉਹਨਾਂ ਦਾ ਆਪਣਾ ਉਹ ਕਹਿ ਰਹੇ ਨੇ ਵੀ ਸਭ ਤੋਂ ਜਿਹੜੀ ਵੇ ਕੀਤੀ ਹੈ ਪਹਿਲਾ ਜਿਹੜਾ ਸਧਿਆ ਬੁੱਲਸੀ ਬਾਉਦੀ ਕੀਤੀ ਹੈ ਲੈਨੇ ਨੇ ਪਹਿਲਾ ਬੁੱਲਸਾ ਜਿਹੜਾ ਰਖਦਾ ਉਹਦੀ ਸੰਬਦ ਕੀਤੀ ਹੈ ਉਹ ਗੱਲ ਦੱਸ ਰਿਹਾ ਦੇ ਹਿਸਟਰੀ ਦਾ ਉਹ ਕਰਕੇ ਦਿਖਾਤਾ ਪੰਜਵੀਂ ਤੋਂ ਬੈਠੇ ਦੇ ਪਿਛਲੀ ਗੱਲ ਕਰ ਰਹੇ ਦੇ ਸਾਜੇ ਹੁੰਦਾ ਉਹਦੀ ਸੰਬਦ ਵਿੱਚ ਨਵੇੜਾ ਹੋ ਜਾਂਦਾ ਛੱਡ ਦਿੰਦਾ ਪਿੱਛੇ ਕੋਈ ਛੱਡਿਆ ਹੋਇਆ ਸਬਦ ਕੋਈ ਉੱਤਰ ਹੈਗੇ ਸ੍ਰੀ ਚੰਦ ਰਖਮੀ ਚੰਦ ਉਹਨਾਂ ਦਾ ਨਵੇੜਾ ਹੋਇਆ ਨਹੀਂ ਤਾਂ ਦੁਆ ਕਿਸੇ ਦਾ ਕੀਤਾ ਦੁਆ ਕਦੇ ਕਦੀ ਕੀਤਾ ਉਹਨਾਂ ਨੇ ਦਾਤੂ ਦਾ ਸੁਦੇ ਦਾ ਦੁਆ ਪੈਦਾ ਹੋਇਆ ਰਾਂ ਉਹੀ ਕਹਿ ਰਹੇ ਹਨ ਗੱਲ ਆਪ ਅਸੀਂ ਗੁਰੂ ਆਂ ਮੈਂ ਤਾਂ ਆਪਨੇ ਲੈਵਲ ਤੇ ਚੱਲੋ ਆਪ ਤਾਂ ਸੁਣੀ ਹੋਈ ਸੀ ਗੱਲ ਦੁਆ ਕੋਈ ਕਦੇ ਕੀਤਾ ਕਿ ਕਿਸੇ ਲੋਕ ਛੱਡਿਆ ਉਹ ਉਹ ਰੂਹ ਵੀ ਗੱਲ ਹੈ ਉਹਨਾਂ ਦੀ ਸੰਗਤ ਦਾ ਵੀ ਉਹਨਾਂ ਦੀ ਵੀ ਸੰਗਤ ਹੈ ਸੰਗਤ ਉਹਨਾਂ ਦੀ ਵੀ ਹੈ ਸੰਗਤ ਅਸਲੀ ਔਰ ਨਕਲੀ ਸੰਗਤ ਦੀ ਗੱਲ ਕਰ ਰਹੇ ਹਾਂ ਅਸਲੀ ਸਾਥ ਔਰ ਨਕਲੀ ਸਾਥ ਦੀ ਗੱਲ ਕਰ ਰਹੇ ਹਾਂ ਸੈਂਟਰ ਉਸ ਵੇਲੇ 5 ਦੇ ਸਿੱਖੀ ਦੇ ਪਰਚਾਲਾ ਕਿ ਬਲਕੇ ਕਿਆ ਕੋਈ ਰਾਮਦਾਸ ਸਾਹਿਬ ਸੈਂਟਰ ਇਹਨੂੰ ਕੋਲ ਹੈ 4 ਦੇ ਉਹਦਾ ਸੈਂਟਰ ਨੇ ਪਹਿਲੇ ਉਹ ਨਾਲ ਨਾਲ ਹੀ ਜਾ ਰਹੇ ਹਨ ਸਮਝਦੇ ਹੋਰ ਕਹਿ ਨਾਲ ਨਹੀਂ ਕਿਉਂਕਿ ਇਹੀ ਗੁਰਮਤਿ ਦਾ ਦੇਖੋ ਪਹਿਲਾ ਜਿਹੜਾ yogi ਨਾਲ ਗੱਲ ਹੈ ਉਹਨਾਂ ਦੀ મત ਹੋਰ ਹੈ ਉਹਨਾਂ ਨੇ મત ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਸੈਂਟਰ ਨੇ ਉਹ ਇਸੇ ਮੱਧ ਦਾ ਪ੍ਰਚਾਰ ਕਰਦੇ ਗੁਰਮਤਿ ਹੀ ਕਰ ਰਹੇ ਨੇ ਪ੍ਰਚਾਰ ਇੱਥੇ ਹੁਣ ਲੋੜ ਪਈ ਇਹ ਗੱਲ ਕਹਿਣ ਤਾਂ ਲੋੜ ਪਈ ਵੇ ਆ ਜਿਹੜਾ ਕਾਰਨ ਇਹਨਾਂ ਨੇ ਦੇ ਕੀਤੇ ਆਪਣਾ ਬੰਦੀ ਸਾਡੇ ਆ ਜਿਹੜਾ ਕਬੀਰ ਨੇ ਕਿਹਾ ਸੀ ਸਾਦੇ ਸਦ ਹੋਏ ਤਾਂ ਇਹ ਨਾ ਜਾ ਉਹ ਗਾਂ ਮੋਹੀ ਨਹੀਂ ਚਲੀ ਕਾਹਨ ਪ੍ਰਚਾਰ ਦੋ ਤਿੰਨ ਸਬਦ ਹੁੰਦੇ ਨੇ ਤਿੰਨ ਨਹੀਂ ਸਬਦ ਜਿਹੜੇ ਸ਼੍ਰੀ ਜਾਂਦਾ ਤੇ लट्मारंदा कारण ऊनदा पता लगता <laughs> है गुरु कहो रे वो कल यही तांद बहुत है उन्होंने गुरु मंदाते लठमारी क्यों मारी गुरु बणे बैठा था तो गुरु आप कहोदय सी प्रचार भी करदे चंद्र ने है कि उधर उधर भी शिव ब्लास तीन पीढ़ियां चली गई है प्रचार होता रहा पोती साहब उधर ਉਹਨਾਂ ਪ੍ਰਤੀਜਿੰਦਾਂ ਨਾਲ ਜ਼ਿਆਦਾ ਇਹਦਾ ਨਾਲ ਜ਼ਿਆਦਾ ਉਹ ਜ਼ਿਆਦਾ ਹਾਈਲਾਈਟ ਹੋਊਗਾ ਸੈਂਟਰ ਵਿੱਚ ਇਹ ਨਹੀਂ ਨਹੀਂ ਪ੍ਰਤੀਜਿੰਦਾਂ ਨਾਲ ਤਾਂ ਬਹੁਤ ਲੱਭਾ ਚੱਲੇ ਆ ਪ੍ਰਤੀਜਿੰਦਾਂ ਨਾਲ ਉਹ ਸੰਗਤ ਵਿੱਚ ਜ਼ਿਆਦਾ ਜੁੜੀ ਹੁੰਦੀ ਹੈ ਨਾ ਉਹ ਕਾਮਯਾਬ ਨਹੀਂ ਹੋਏ ਗੱਲ ਕਰਦੇ ਰਹੇ ਕਾਮਯਾਬ ਨਹੀਂ ਜੁੜੀ ਨਾ ਪਬਲਿਕ ਐਂ ਨਾ ਉਹ ਸਾਰੇ ਚਾਰੇ ਇਕੱਠੇ ਰਹੇ ਨੇ ਆਹ ਉਹ ਜਿਹੜਾ ਮਰ ਗਿਆ ਮੈਂ ਸਹਿਮਤੀ ਹੋ ਜਾਂਦੀ ਹੁੰਦੀ ਉਹ ਸਹਿਮਤੀ ਇਕੱਠੇ ਰਹੀ ਆ ਉਹਨਾਂ ਦੀ ਕੋਈ ਕੋਈ ਗੱਲ ਕਰਦੇ ਨਹੀਂ ਉਹ ਵਿਰੋਧ ਕਰਦੇ ਨਹੀਂ ਉਹਨਾਂ ਨੇ ਪਿਛਲੀ ਮੱਤ ਪਾਉਣਾ ਸੀ ਉਹ ਚਾਰੇ ਇਕੱਠੇ ਰਹੇ ਦੇਖੋ ਬੋੜੀ ਸਾਹਿਬ ਤੇ ਇਹ ਕਹਿਣ ਕਿ ਗੁਰੂ ਅਮਰਦਾਸ ਕਿੰਨੀ ਤੂੰ ਕੇਸ ਵੱਢ ਕੇ ਤਪ ਕਰਦੇ ਰਹੇ ਦੇ ਜਦ ਉਹ ਗੁਰਿਆਈ ਤੋਂ ਬਾਅਦ ਉਥੇ ਦੇ ਖਡੂਰ ਨਾ ਉਥੇ ਉਹ ਤਾਂ ਗੁਰਾਇਤ ਤੋਂ ਪਹਿਲਾਂ ਉਹ ਗੁਰਾਇਤ ਤੋਂ ਪਹਿਲਾਂ ਮਿਲ ਗਈ ਕਰੇ ਉਹਦੇ ਬਾਅਦ ਤਾਂ ਤੱਪ ਜਾ ਬਹੁਤਾ ਹੀ ਦੀ ਹੁੰਦੀਆਂ ਉਹ ਜੱਪ ਤਪ ਤੋਂ ਬਾਅਦ ਤਾਂ ਗੁਰਾਇਤ ਵੀ ਮਿਲ ਕਿਹੜੇ ਤੱਪ ਦੀ ਗੱਲ ਕਰਦੇ ਰਹੋ ਨਾਮੇ ਜਾ ਕੇ ਕਿਵੇਂ ਭਾਜਿਆ ਦੇ ਪਿੱਛੇ ਸਭ ਕੁਝ ਹੈ ਕਿਹਦੇ ਨਾਲੇ ਬੇਰੀ ਦੀ ਕਹਾਣੀ ਸੁਣਾਤੀ ਆਜੋ ਕਿਤੇ ਉਹ ਬਾ ਕਰਤੀ ਕਿ ਜੋਸ਼ ਨਹੀਂ ਸ੍ਰੀ ਗੰਦੀ ਕਰਾਮਾਤ ਦਿਖਾਤੀ ਇਹਨਾਂ ਨਾਲੇ ਕਿਤੇ ਉਹ ਗਲਤੀ ਸੀ ਉਸ ਜਿਹੜੇ ਉੱਚੇ ਮੰਦਰ ਚਾਰੇ ਤੇਰੇ ਬੋਕਦੇ ਉਹਦੀ ਕਥਾ ਕਿਉਂ ਜੋੜੀਏ ਉਹਦੇ ਨਾਲ ਪੰਜਵੇਂ ਪਾਸ਼ ਨੂੰ ਕਿਉਂ ਗਿਆ ਵੀ ਥੱਲੇ ਬਹਿ ਕੇ ਜਾ ਕੇ ਜੀਵੇਂ ਦਿਖਾਤਾ ਲੋ ਕਿਉਂ ਜੋੜੀ ਕਥਾ ਇਹ ਸਾਥੀ ਗਾ ਗੂ ਉਹ ਉੱਚੇ ਤੇ ਵਸਦਾ ਉਹਦੀ ਉੱਚੀ ਸੀ ਇਹ ਵੀ ਬੰਦ ਤੇ ਰੋਲ ਗੱਲਾਂ ਦੇ ਵਿੱਚ ਕੀ ਸੀ ਕਿ ਉਹ ਮੇਰੇ ਸਾਥੀ ਉਹ ਜੋ ਕੀ ਕਹਿ ਰਹੀ ਹੈ ਉਹ ਸਾਥੀ ਕੀ ਕਹਿ ਰਹੀ ਸੀ ਐਸਾ ਹੈ ਸਾਡੇ ਕੋਲ ਭਾਵੇਂ ਪਾਸ਼ਾ ਜੀ ਉਹ ਉਹ ਸਾਥੀ ਹੈ ਇਹਦਾ ਲਿੰਕ ਵਿੱਚ ਤਾਂ ਸੀਗੇ ਚਾਰੇ ਪੰਜੇ ਪਿਆ ਤੁਹਾਨੂੰ ਪਤਾ ਲੱਗਦਾ ਚਾਰੇ ਪੰਜੇ ਸੈਂਟਰ ਨੇ ਲਿੰਕ ਸੀਗਾ ਹਾਂ ਲਿੰਕ ਸੀ ਨਹੀਂ ਉਹ ਜਿਹੜੀ ਸਾਖੀ ਹੈ ਜਾਦੇ ਇਹਨਾਂ ਨੇ ਅਰਥ ਕੀਤੇ ਨੇ ਜਦ ਲਾ ਕੇ ਉਹ ਜਮੜੀ ਹਾਂ ਬਈ ਉੱਥੇ ਪੋਥੀਆਂ ਉਹਦੇ ਕੋਲ ਸੀ ਕਿਉਂ ਬਈ ਉਹਦੀ ਉਮਰ ਕਿੰਨੀ ਸੀ ਪੋਥੀਆਂ ਸੀਆਂ ਉਹ ਸ੍ਰੀ ਚੰਦ ਕੋਈ ਜਾਈ ਸੀ ਉੱਥੇ ਕਦੇ ਕਿਹੜੀਆਂ ਪੋਥੀਆਂ ਸੀ ਉੱਥੇ ਕਿਹੜੀ ਪੋਥੀ ਦੀ ਗੱਲ ਕਰਦੇ ਨੇ ਉੱਥੇ ਉਹ ਜੇ ਅਗੂ ਕਰ ਕੋਦੇ ਯਾਨੀ ਗੁਰਿਆਈ ਵਾਲੇ ਨੂੰ ਬੋਥੀਆਂ ਨਹੀਂ ਮਿਲਦੀ ਸੀ ਉਸ ਗੁਰਿਆਈ ਨੂੰ ਮਿਲਦੀਆਂ ਬੋਥੀਆਂ ਸੀ ਜਿਹੜੀਆਂ ਨਾਲ ਕੀਤੀ ਹੈ ਜਿਵੇਂ ਅੱਜ ਆ ਸਾਡੇ ਕੋਲ ਦੋ ਬੋਥੀਆਂ ਨਾਲ ਜ਼ਰੂਰ ਨਾਲ ਸਾਨੂੰ ਹੋਮ ਬਾਅਦ ਲੈ ਦੋ ਬੋਥੀਆਂ ਉਦੋਂ ਦਾ ਸਾਰੇ ਖਰੜੇ ਅੱਡਾ ਜਿਹੋ ਉਹਨਾਂ ਨੇ ਕਬੀਰ ਸਾਹਿਬ ਦੀ ਸਾਰੇ ਅੱਡਾ ਇਹੜੀ ਪੋਥੀ ਲੈਣਗੇ ਤੇ ਗੁਰੂ ਅਰਜਨ ਦੇਵ ਜੀ ਬਾਣੀ ਕਰ ਲਈ ਹੋ ਸਕਦੀ ਹੈ ਉੱਥੇ ਸਾਹਿਬ ਜੀ ਨੇ ਆਪਣੀ ਕੋਸ਼ਤਰੀ ਚ ਲੈ ਕੇ ਆਇਆ ਹੈ ਜੀ ਕਿ ਗੁਰੂ ਨਾਨਕ ਜੀ ਨੇ ਫਰਕਾਨੀ ਬਾਣੀ ਤੇ ਮੈਂ ਉਹੀ ਕਹਿ ਨਹੀਂ ਤਾਂ ਉਹ ਪੋਥੀਆਂ ਫਿਰ ਉਹ ਸ੍ਰੀ ਗੁਰੂ ਗ੍ਰੰਥ ਰਹਿ ਜਾਂਦੀਆਂ ਸ੍ਰੀ ਗੁਰੂ ਦਾ ਮਤਲਬ ਨਹੀਂ ਸੀ ਉਹ ਪੋਥੀ ਬਾਦ ਦੇ ਵਿੱਚ ਮਜਬੂਰੀ ਸੀ ਸੀ ਇਹ ਚੰਦ ਉਹਨਾਂ ਨੂੰ ਜਦ ਗੁਰੂ ਗ੍ਰਾਮ ਸਾਹਿਬ ਬਣ ਗਿਆ ਬਜੂਚਾ ਜਾਦੂ ਸਿਰੀ ਚੰਦ ਉਹਨਾਂ ਨੇ ਇਹਨੂੰ ਪ੍ਰਕਾਸ਼ ਪਹਿਲਾਂ ਨਹੀਂ ਗੁਰਬਾਣੀ ਨੇ ਇਹ ਤਾਂ ਯਾਦ ਕਰੇ ਨੇ ਜਦ 10 ਪਾਸ਼ਾ ਦੇ ਨਾਲ ਰੱਖੇ ਨੇ ਨਾ ਇਹ ਉਦਾਸੀ ਹਾਂ ਉਦਾਸੀ ਉੱਥੇ ਪਹਾਣੀ ਸਾਹਿਬ ਦੇ ਜੰਗ ਵਿੱਚ ਦੁਬਾਰਾ ਆਏ ਦੇ ਗੁਰੂ ਘਰ ਚੇ ਇਹ ਜਾਗ ਲੱਗੇ ਨੇ ਕੰਮ ਕਰ ਪਹਿਲਾਂ ਕਰਦੇ ਦੇ ਪਹਿਲਾਂ ਸ਼ਰੀਕ ਰਹੇ ਦੇ ਜਿਆਦਾ ਹੈ ਗੁਰੂ ਮਹਾਰਮੰਨ ਕਹੇ ਜਾਦੀਵੇਂ ਹੋਏ ਹੋ ਰੱਖੇ ਵੀ ਜਾਤਨਾ ਤਾਂ ਹੀ ਸੀ ਕਿ ਗੁਰੂ ਕਹੋੜੇ ਰਹੋ ਕੌਣ ਜੋਗੀ ਦਾ ਰਹਿਣ ਗੱਦੀ ਉਹਦਾ ਕਿਰਪਾਲ ਦਾਸ ਕੋਲ ਸੀ ਨਾ ਉਹ ਵੀ ਦਾ ਗੁਰੂ ਸੀ ਇਧਰ ਗੱਦੀ ਦਾ ਪਾਸਾ ਕੋਲ ਸੀ ਕਤੇ ਵੀ ਆ ਕੇ ਜਦੋਂ ਸੈਕਟਰ ਹੋ ਗਿਆ ਉਹਦਾ ਡੇਰਾ ਹੀ ਆਡਰ ਤੇ ਕੋਣ ਦਾ ਹਾਂ ਹਾਂ ਡੇਰੇ ਪਾਤਾ ਸਾਡੇ ਕਿਰਪਾਲ ਦਾ ਦਾਸ ਉਹ ਦਾਸੀ ਛੱਡ ਗਏ ਉਹ ਤਾਂ ਭੱਜ ਗਏ ਤੇ ਦਾਸੀ ਤਾਂ ਖੁੱਲਾ ਰਹਿ ਗਿਆ ਫਿਰ ਉਹਨਾਂ ਨੇ ਗੱਲ ਖਟਿਆ ਹੋਇਆ ਜਾਂਦਾ ਹੀ ਖਟਿਆ ਹੋਇਆ ਕਿਵੇਂ ਫਰੀਦ ਨੂੰ ਮੁਸਲਮਾਨਾਂ ਨੇ ਕੱਟਦਾ। ਫਰੀਦ ਨੂੰ ਮੁਸਲਮਾਨਾਂ ਨੇ ਕੱਟਦਾ। ਅਨੇ ਹਮ ਸੱਤੇ ਨੂੰ ਮੁਸਲਮਾਨਾਂ ਨੇ ਕੱਟਿਆ ਅਰੇ ਛੱਕਿਆ। ਗੱਲ ਨਹੀਂ ਕਰਦੇ ਗੱਲ ਉਹ ਕਰਦੇ ਹਮਾਰੇ ਬਹੁਤ ਵੱਡੇ ਵੱਡੇ। ਮਹਾਨ ਆਦਮੀ ਹੈ ਵੱਡੀਆਂ ਵੱਡੀਆਂ ਹਸਤੀਆਂ ਹੈ। ਇਹਰ ਕੋਈ ਜਿਵੇਂ ਨਹੀਂ ਵਾਹ ਉਹਦੇ ਮੁਕਾਬਲੇ। ਉਹ ਤੁਸੀਂ ਤਾਂ ਭਾਈ ਉਹਨਾਂ ਨੂੰ ਮਗਾਉਂਦਾ। ਜੀ ਤਾਂ ਉਹਨੂੰ ਮਜਾਦਾ ਬੋਲ ਰਿਹਾ ਸਾਈ ਨੀ ਆਂਦੀ ਉਹ ਆਪਾਂ ਹਾਈਲਾਈਟ ਕਰ ਦੇ ਦੇਖੋ ਉਹ ਤਾਂ ਮਰੇ ਨਹੀਂ ਕਰਦੇ ਸਾਡੀ ਨਾ ਵੀਰ ਗੁੱਤੂ ਸ਼ਾਦੀ ਗੱਲ ਕਰਦੇ ਆਹ ਉਹਨਾਂ ਦੇ ਖਿਲਾਫ ਹੈ ਉਹਨਾਂ ਦੀ ਬੇਟੀ ਹੈ ਇਹੋ ਗੱਲ ਜਦੋਂ ਕਹੀਏ ਸਾਡਾ ਸਾਡੀ ਬੇਟੀ ਹੈ ਉਹ ਕਾਹਨ ਬੜਾਈ ਕਰਦਾ ਸਾਡਾ ਨਹੀਂ ਹੈਗਾ ਉਹ ਜੀ ਨਾਲੇ ਉੱਤਰ ਪਾਈਆ ਮਾਰਾ ਉਹ ਘਰ ਵੀ ਨੂੰ ਕੱਲ ਮੁਰਟੀਏ ਉਜਿਹਦਾ ਚੇਲਾ ਬਣ ਜਾ ਉਹਦਾ ਹੀ ਆ ਪਾਉ ਉਹਨੂੰ ਹਾਂਜੀ ਸਾਧਕੇ ਸੰਗੀ ਪਾਏ ਨਾਮ ਰਤਨ ਸਾਧਕੇ ਸ਼ਕਤੀ ਪਾਏ ਨਾਮ ਰਤਨ ਜੇ ਸਾਧੀ ਸੰਗਤ ਕਰ ਤਸ ਜੇ ਸਾਧਕਾਇ ਸੁਖੀ ਹੋਣ ਉਹਨਾਂ ਵਿੱਚ ਮਨ ਥੋੜਾ ਸਾਹ ਜਾਣਾ ਉਹਦੇ ਨਾਮ ਰਤਨ ਬਾਝ ਮਿਲਣਾ ਹੈ ਨਾਮ ਰਤ ਉਹ ਜਾਨਵਰ ਦਾ ਨਾਮ ਰਤਨ ਜਾਨਵਰ ਦਾ ਨੰ ਘਟਿਆ ਇਹ ਨਾਮ ਰਤਨ ਜਾਨਵਰ ਦਾ ਹੈ 색 ਰੰਗ ਬਦਲਦਾ ਨਾ ਹੈ ਜੇ ਪੇੜ ਹੁੰਦਾ ਹਰਾ ਹੋ ਜਾਂਦਾ ਆਂਦਾ ਜਿੱਟਾ ਹੁੰਦਾ ਮੁਰਗਾ ਹੋਇਆ ਤੁਹਾਨੂੰ ਮੈਂ ਦੱਸ ਦੂੰ ਕਿ ਨਹੀਂ ਜਾਂਦਾ ਤੁਸੀਂ ਦੇ ਵਾਰ ਹੀ ਹੁੰਦਾ ਇਤੋਂ ਲੋੜ ਉਹ ਫੀਲੇ ਰੰਗ ਉਹ ਇਸ ਕਰਕੇ ਇਹਦਾ ਜਿਹੜਾ ਰੰਗ ਹੈ ਨਾ ਇਹਦਾ ਰੰਗ ਜੜਦਾ ਹੈ ਬੰਨੂ ਉਹ ਵਾਂਡੂ ਚਿਰਦੇ ਨੂੰ ਰੰਗ ਚੜਦਾ ਤਾਂ ਕਿਤੇ ਜਾ ਕੇ ਉਹ ਦੁਦਾ ਕਲਕ ਕਲੈਂਦਾ ਜੀਲਾ ਪਰਮਕਾ ਹੁੰਦਾ ਸਾਧ ਕੇ ਸੰਗ ਜਦ ਮਨ ਸਾਝ ਜਾਂਦਾ ਇਹਦੇ ਨਾਲ ਮਾਇਆ ਦਾ ਮੋਹ ਉਤਰ ਜਾਂਦਾ ਨਾ ਜਾਦੇ ਨੂੰ ਖੂਬ ਚੜਦੀ ਐ ਇਹ ਤਨ ਮਾਇਆ ਪਾਇਆ ਪਿਆਰੇ ਲਿਤੜਾ ਲਬਰਦਾ ਐ ਮਾਇਆ ਦਾ ਪਾ ਦੇ ਪਾ ਇਹਦਾ ਲਾ ਕੇ ਮਾਇਆ ਦਾ ਪਾ ਲਾ ਕੇ ਤਾਂ ਨਾਮ ਦਾ ਰੰਗ ਚੜ ਲੇ ਕੋਣ ਸੰਤੋਖ ਦਾ ਪਾ ਚੜੜੋੜ ਪੈਨੋ ਵੜਾ ਗਿਆਨ ਹੈ ਨਾ ਆ ਗਿਆਨ ਦੀ ਲਾਗ ਕਹਿੰਦੇ ਆ ਲਾਗ ਲਾਤੀ ਗਿਆਨ ਦੀ ਉਹ ਪਹਿਲਾ ਜਿਹੜਾ ਗੁਰਬਾਣੀ ਵਾਲਾ ਗਿਆਨ ਹੈ ਦੀ ਲਾਗ ਲੱਗਣੀ ਏ ਇਹ ਮਾਇਆ ਲੈ ਜਾਣੀ ਏ ਇਹਦੇ ਨੂੰ ਇਹ ਸਾਬਣ ਹੈ ਨਾ ਤੇ ਸਾਬਣ ਲਈਏ ਤੋਏ ਮਰੀਂ ਬਾਅਦ ਇਹਨੂੰ ਰੱਖ ਚਾੜਨਾ ਉਹ ਰਤਨ ਬਾਅਦ ਵਿੱਚ ਲੋੜ ਆਉਦੀ ਨਾਮ ਰਤਨ ਦੀ ਇਹ ਪਹਿਲਾ ਰੰਗ ਘਾਟ ਹੈ ਸਾਬਣ ਐਸ ਨਾਮ ਨੂੰ ਸਾਬਣ ਕਹਿ। ਵੈਲਣ ਵਾਲੇ ਨੂੰ ਉਸ ਨਾਮ ਨੂੰ ਰਤਨ ਕਹਿ ਰੰਗ ਚਾੜਨ ਵਾਲੇ। ਸਾਧਕੇ ਸੰਗੀ ਇੱਕ ਉੱਪਰ ਜਤਨ। ਸਾਧਕੇ ਸਭੀ ਇੱਕ ਉੱਪਰ ਜਤਨ। ਜਦ ਮਾਨ ਸਾਝ ਜਾਂਦਾ ਹੈ। ਨਿਕੋ ਹੋ ਜਾਂਦਾ ਹੈ। ਆਪੇ ਇੱਕਦੇ ਜੁਮੇ ਬਾਦੀ ਹੈ ਵੇ ਕਹਾਂ ਦਾ ਕੰਮ। ਇੱਕ ਉੱਪਰ ਦੋ ਤਾਂ ਜਾਂ ਤਾਂ ਨਹੀਂ ਬੰਦਾ ਕੋਈ ਅਦਰ ਨਹੀਂ ਰੋ ਸਕਦਾ ਬੰਦਾ ਕਮ ਖਾਦਾ ਬਸ ਕਿਹੋਂ ਗਿਆ ਵਿਚੇ ਹੀ ਹੈ ਹਾਂ ਜਿਹੇ ਕੋ ਗਿਆ ਹੋ ਗਿਆ ਤੂੰ ਸੰਤਾਂ ਕਹਿ ਬੱਸ ਸੰਤਾਂ ਤਾਂ ਤੇਰਾ ਤੇਰੀ ਸ਼ਕਤੀ ਸੰਤ ਤੇ ਜ ਸੰਤ ਦੀ ਸ਼ਕਤੀ ਵੀ ਸਮਾ ਉਹ ਜਿਹੜੀ ਮਾਨਸਰ ਦੀ ਸ਼ਕਤੀ ਕੋਈ है ਹੈ ਉਹ ਦਾ ਜਤਨ ਤਾਂ ਤਾਂ ਕਿਤੇ ਨਾਮ ਸੁਣਦਾ ਇੱਕ ਉੱਪਰ ਜਤਨ ਆਪਕੇ ਸਾਹਦੇ ਇੱਕ ਉੱਪਰ ਜਤਨ ਲੱਗੇ ਸੰਗੀ ਬੁੱਧੀ ਜਦੋਂ ਸਾਰਾ ਇੱਕਦੇ ਉੱਤੇ ਹੈ ਹੁਣ ਬੁੱਧੀ ਜਦੋਂ ਕਰ ਰਹੀ ਇਹ ਤਾਕਤ ਆ ਗਈ ਤਾਕਤ ਪ੍ਰਸਾਧ ਹੋਰ ਆ ਗਿਆ ਹੋਰ ਆ ਗਿਆ ਜਾਂ ਪਟਾ ਦਾ ਡਬਲ ਹੋ ਗਿਆ ਤਾਕਤ ਕੋਣੋ ਚੀਜ਼ ਕੱਢ ਲੂ ਕੋਈ ਕਾਮਯਾਬੀ ਹੈ ਤੇਰੀ ਬੁੱਧ ਪਾਲ ਤੇ ਬੁੱਧ ਪਾਲ ਜਿਹੜਾ ਹੈਗਾ ਬੁੱਧ ਪਾਲ ਨੇ ਡਿਵਾਈਡ ਹੁੰਦਾ ਸੀ ਜਾਂ ਦੂਆ ਪਾਸੇ ਜਦੋਂ ਪੂਰਾ ਜਿਹੜਾ ਸ਼ਬਦ ਵਿਚਾਰ ਚ ਤਾਕਤ ਰਵੀਜ਼ ਹੀ ਲੱਗਦੀ ਉਹ ਰਗੜਨ ਲੱਗੀ। ਜਿਆ ਜੋ ਅਮਦਰ ਆਪਾ ਵਿਚਾਰ ਕਰਦੇ ਹਨਾ ਵਿਚਾਰ ਪੂਰਾ ਟਿਕਣ ਲੱਗਿਆ ਪੂਰੀ ਤਾਕਤ ਨਾਲ ਬੁੱਧੀ ਦੀ। ਆਪਾ ਬਹੁਤੀ ਗਵਰਨਰ ਦੇਖਦੇ ਹਾਂ ਕਿਸੇ ਚੀਜ਼ ਨੂੰ ਨਾ ਬਹੁਤੀ ਗਵਰਨਰ ਅਤਿਅਕ ਗਵਰਨਰ ਜਦ ਦੇਖਦਾ ਜਦ ਬੁੱਧਿ ਨੂੰ ਰਜਵੇ। ਇਹ ਦੁਨੀਆਂ ਦਾ ਵਿੱਚ ਹਵਾ ਬੁੱਲਾ है ਨਾਲ ਫਿਰ ਪੂਰੀ ਲੋੜ ਨਹੀਂ ਹੁੰਦੀ ਨਹੀਂ ਆਸ਼ੀ ਪੂਰੀ ਹੋਰ ਨਹੀਂ ਦੇ ਸੋ ਬੁੱਧ ਵਰ ਵੀ ਬੱਧਾ ਰਹੇ ਰੋਈ ਹਾਂ ਇੱਕ ਉੱਪਰ ਜਾਂਦਾ ਨੂੰ ਸਾਰ ਕੀ ਮਹਿਮਾ ਵਰਨੇ ਕੋਈ ਨਾ ਸਤਿਗੁਰ ਤੋਂ ਪ੍ਰਕਾਸ਼ ਵਾਵੇ ਸਤਿਗੁਰ ਇੱਕ ਇੱਕ ਆਪਣਾ ਕੰਮ ਆਪਣੇ ਇੱਥੇ ਆਪਣਾ ਇੱਥੇ ਆ ਕੇ ਆਪਣੇ ਇੱਥੇ ਆਪਣਾ ਆਪ ਹੀ ਦਸਵਾਰ ਹੋ ਗਏ ਜਾਂ ਗੱਲ ਇੱਕ ਦਿਨ ਉੱਤੇ ਆਉਂਦੀ ਹੈ ਨਾ ਬੰ ਅਰਬੁਦ ਛੱਡ ਦਿੰਦੇ ਨੇ ਬਰਤ ਜਤਨ ਛੱਡ ਦੇ ਆਪਣਾ ਜਤਨ ਛੱਡ ਦਿੰਦੇ ਨੇ ਬੰ ਅਰਬੁਦ ਫੈਨਾ ਮੰਨਦਾ ਜਤਨ ਕਦੇ ਉਹਦਾ ਉੱਪਰ ਚਾੜ ਲੀਏ ਉਹ ਪਾਠ ਕਰਾ ਲੀਏ ਉਹ ਉੱਥੇ ਜਾਇਆ ਇਹ ਜਦ ਤਨਾ ਨੋ ਵੀ ਇਹ ਮੁੱਕ ਜਾਂਦੇ ਨੇ ਸਾਰੇ ਹੀ ਚੰਨ ਇਹ ਮੁੱਕ ਗਏ ਸਰਵਾਗਾਲ ਲਈ ਕੋਈ ਨੰਨੇ ਚੋਂ ਉਥੇ ਕੋ ਦਿਐ ਇਹ ਇਹ ਜਿਹੜੇ ਯਤਨ ਨੇ ਮੁੱਕ ਜਾਂਦੇ ਨੇ ਫਿਰ ਫਿਰ ਕੋਈ ਯਤਨ ਲੈ ਜਾਂਦਾ ਪਤਾ ਵੀ ਇਹ ਤਾਂ ਹੋਣਾ ਦੇਣਾ ਕਿ ਨੂੰ ਆ ਦੇਣਾ ਵੀ ਹੋਣਾ ਮੇਰਾ ਉਹ ਪੈਣਾ ਜਤਨ ਵਾਸਤੇ ਦੰਦਾ ਫਿਰ ਮੇਰਾ ਹਈ ਨਹੀਂ ਜਿਹਦਾ ਨਾ ਦਿੱਤਾ ਗਿਆ ਤਾਂ ਮੁੱਢ ਹੀ ਫਿਰ ਇਹ ਵੀ ਦਿੱਤਾ ਗਿਆ ਤਾਂ ਮੁੱਢ ਹੀ ਨਾ ਮੈਨੂੰ ਤਾਂ ਨਹੀਂ ਮੁੱਢੀ ਚਲੋ ਉਹ ਕੋਈ ਬੋਲਣਾ ਉਹਦੇ ਨਾਲ ਜਿਹੜਾ ਬਹਿਮ ਪੈਦਾ ਹੁੰਦਾ ਨਾ ਘਰ ਨੂੰ ਉਹ ਬਹਿਮ ਪੈਦਾ ਹੁੰਦਾ ਹਰ ਜਲਦ ਉਹਦਾ ਪਰ ਪੈਦਾ ਹੁੰਦਾ ਉਹ ਹਰ ਜਲਦ ਹੈ ਤਾਂ ਵੀ ਕੋਈ ਨਾ ਦਿੱਤਾ ਗਿਆ ਤਾਂ ਮੁੱਢ ਹੀ ਇਹ ਉਗਾਨੇ ਜੋ ਮਹਾਰਾਜ ਦੀ ਸਾਰੀ ਜੀ ਖੜਾ ਹੋ ਕੇ ਦੁਕਾਨਾਂ ਦੇ ਬਾਹਰ ਜਿਗਰੇ ਜੀ ਨਿਕਲ ਗਿਆ ਕਾਫੀ ਕੋਈ ਗੱਲ ਨਹੀਂ ਨਾਨਕ ਦੇਸਾ ਇਹ ਜੇ ਧਾਮੇ ਬਾਜੀਆਂ ਨੇ ਸਾਰੀਆਂ ਇਹ ਧਾਮੇ ਦੇ ਇਹ ਧਾਮਿਆਂ ਨੇ ਦਸ ਬੂਹ ਗੁਰਬਾਨੀ ਮੰਨਣ ਦੇ ਅਡਾਸ ਭੈ ਚੱਤੀ ਜੀ ਜਸਲ ਭੈ ਚੱਤੀ साध की महिमा वर्णन कौन प्राणी साध की महिमा देखो हुन की महिमा आ गया मैं गया भाई साध दी गल चलदी है साध दी संगत करने दी गल कर चलदी है ओ तो साध ही चलदी है ना लोदर आगे ना आगे नमाज और पता शुरू है ਉਹ ਸਾਧ ਕੇ ਸੰਗੀ ਮੁਖੋ ਜਲ ਹੁੰਦਾ ਐ ਸਾਧ ਦੀ ਸੰਗਤ ਨਾਲ ਮੁਖੋ ਜਲ ਨਹੀਂ ਹੋਣਾ ਮਨ ਸਾਧੇ ਤੇ ਮੁਖੋ ਜਲ ਹੋਣਾ ਉਹ ਗੱਲ ਹੋਰ ਐ ਐਂ ਦਾ ਬਸ ਸਾਧ ਦੀ ਸੰਗਤ ਨਾਲ ਮੁਖੋ ਜਲ ਤਾਂ ਆਪ ਨੂੰ ਕੋਰਦੀ ਲੋੜ ਦੀ ਉਹ ਇਹ ਐ ਤੇ ਇਹ ਕਰਨਾ ਚਾਹਦਾ ਬਨਣਾ ਚਾਹਦਾ ਸਮਝਣਾ ਚਾਹਦਾ ਸਮਝਾਉਣ ਵਾਲਾ ਚਾਹੀਦਾ ਪਰ ਆ ਗੱਲ ਐ ਜਿੰਨਾ ਜਨਮ ਚਾਹਦਾ ਨਹੀਂ ਪਹਿਲਾਂ ਮਨ ਨੂੰ ਬਣਾਉਣ ਵਾਲੀ ਗੱਲ ਚਲਦੀ ਸਾਧ ਕੇ ਸਦੀ जे ਬੱਚਾ ਪੜਨਾ ਚਾਹੁੰਦਾ ही नहीं है, तो स्कूल चाहे ਕੇ ਸੇ दो, कोई ਕੋਈ ਫਰਕ ਨਹੀਂ ਪੈਦਾ ਜੇ ਚਾਹੁੰਦਾ ਫਿਰ ਭਾਈ ਉਹਨੂੰ ਦੇਖਣਾ ਪਊ ਸਕੂਲ ਵਧੀਆ ਟੀਚਰ ਵਧੀਆ ਚਾਹੀਦਾ ਜਿਹੜਾ ਉਹਨੂੰ ਵਧੀਆ ਪੜ੍ਹਾ ਦੇ ਉਹ ਤਾਂ ਉਹਦੇ ਬਾਅਦ ਦੀ ਗੱਲ ਹੈ ਲੋ ਚਾਹੁੰਦਾ ਫਿਰ ਟੌਪ ਦਾ ਚਾਹੀਦਾ ਫਿਰ ਉਹ ਚਾਹੀਦਾ ਜਿਹੜਾ ਉਹਨੂੰ ਅਪਰ ਤਾਲੀਮ ਦੇਣੀ ਚਾਹੁੰਦੇ ਆ ਜੋ ਗਿਆਨ ਗੱਲ ਚਾਹੀਦਾ ਤੇ ਸਰਵਿਸਰੀਏ ਸੌਣਾ ਪਊਗਾ ਜੋ ਲੈਣ ਵਾਲਾ ਸੀਰੀਅਸ ਹੈ ਤੇ ਤੇਰੇ ਪੂਰਾ ਚਾਹੀਦਾ ਇਹ ਲੈਣ ਵਾਲਾ ਸੀਰੀਅਸ ਹੈ ਵੀ ਤਾਂ ਲੈਣ ਵਾਲੇ ਸੀਰੀਅਸ ਨੇ ਤਾਂ ਤੇਰੇ ਨਾਲੇ ਦੇ ਪੱਲੇ ਕੁਝ ਆ ਉੱਥੇ ਉਹਨਾਂ ਦਾ ਵਧੀਆ ਚੱਲਦਾ ਕੰਮ ਸੋਜੀ ਸਾਥ ਕੀ ਮਹਿਮਾ ਸਾਧਾ ਬੜਪੜ ਕੋਣ ਪ੍ਰਾਣੀ ਬਰੂਰ ਕਰੇ ਕਿਉਂ ਸਾਧ ਕੀ ਮਹਿਮਾ ਨਾਨਕ ਸਾਧ ਕੀ ਸਾਧ ਕੀ ਮਹਿਮਾ ਵਰਨੇ ਕੋਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪਰਮ ਮਹੇਸ਼ ਮਾਰ ਸੋਭਾ ਪਰਮ ਮਹੇਸ਼ ਸਾਧ ਕਹਣਾ ਮੇਰੀ ਜੀ ਸੋਭਾ ਪਰਮ ਦੀ ਸੋਭਾ ਉਹੀ ਉਹਦੇ ਵਿੱਚ ਸੋਭਾ ਜੁਈ ਉਹਦੇ ਉਹ ਕਹਾਂ ਬੁਲਾਉਂਦਾ ਹੋਇਆ ਸੋਭਾ ਉਹੀ ਹੁਈ ਸਾਰ ਕੀ ਸੋਧ ਨਹੀਂ ਆਈ ਜਰ ਕੀ ਸੋਭਾ ਪਰ ਮਾਹੇ ਸੁਵਾਨਾ ਪਹਿਲਾਂ ਤਾਂ ਜੇ ਪਖਦਾ ਕਿਤੇ ਕੋਰਾਂ ਕਾ ਵੀ ਚਾਲ ਬਈ ਇੱਥੇ ਤੂੰ ਰੁਕ ਗਿਆ ਜਾਨਾ ਇੱਥੇ ਆ ਜਾਂਦਾ ਤੁਸੀਂ ਵੀ ਰੱਖ ਲਓ ਲੈ ਆਇਆ ਕਾ ਟੋਕਰਾ ਜਿਹੜਾ ਆਉਂਦਾ ਕੋਈ ਚਲੋ ਉਹਨੂੰ ਉਹ ਲੰਗਰ ਉਹ ਵਗਾ ਦੇਵੇਂ ਵਰਤਾਉ ਮੈਂ ਦੇਣਾ ਵਰਤਾਉਣ ਦੀ ਸੋਭਾ ਇਦਿਸਟਾਰ ਕਰ ਗਏ ਬੇਦੜੇ ਇਹ ਤਾਂ ਕਹੂਆ ਜੇ ਕੋਈ ਇਹੋ ਜੀ ਗੱਲ ਹੋਵੇ ਇਹ ਗੱਲ ਹੈ ਉਹਦੀ ਸੋਭਾ ਪ੍ਰਭ ਮਹੇ ਸਬੰਧੀ ਅਸੱਤ ਬਨ ਸਾਧ ਆ ਹੁਣ ਤੇ ਸਾਥ ਜਿਤਨੀ ਹੁੰਦਾ ਸਾਥ ਬਨੇ ਹੁੰਦਾ ਹੈ ਜਿਹੜਾ ਸਾਧੇ ਹੋਈ ਸਾਧ ਹੈ ਜਿਹੜਾ ਸਾਧੇ ਹੋਈ ਸਾਧ ਹੈ ਫਦਿਆ ਹੋਇਆ ਬਨ ਸਾਧ ਹੈ ਅਸਲ ਸਦੇ ਹੋਏ ਮਨ ਨੂੰ ਹੀ ਸੋਜੀ ਹੁੰਦੀ ਹੈ ਤੇ ਆਪ ਕੋ ਸਿੱਧੀ ਹੋਏ ਸੋਜੀ ਹੋਗੀ ਫਿਰ ਉਹ ਸੁਜੀ है ਜਾਂਦੀ ਹੈ ਆਤਮ ਆਪਣਾ ਵੀ ਸਮਝ ਆ ਜਾਂਦੀ ਹੈ ਸਰੀਰ ਦਾ ਆਪਣਾ ਫਰਕ ਦਾ ਪਤਾ ਲੱਗ ਜਾਂਦਾ ਹੈ ਰੱਬ ਦਾ ਵੀ ਪਤਾ ਲੱਗ ਜਾਂਦਾ ਹੈ ਮੇਰੀ ਹੋਂਦ ਕਿੱਥੋਂ ਹੈ ਇਸ ਕਰਕੇ ਉਹ ਜਦ ਬੈਣ ਨਹੀਂ ਕਚ ਹੋ ਨਹੀਂ ਉਹ ਕਹਿੰਦਾ ਵੀ ਇਹ ਠੀਕ ਹੈ ਕੋਈ ਛੋ ਦੇ ਵਿੱਚੋਂ ਸਾਨੂੰ ਆਰਾਮ ਮਿਲਦਾ ਪਰ ਤਰਖਦੀ ਗੱਲ ਕਰੋ ਛੌਂਦੀ ਗੱਲ ਕਰਦੇ ਕਬ ਤਰਖਦੀ ਕਰੋਗੇ ਕਰੋਗੇ ਰਸਤੇ 'ਤੇ ਹੋਣੇ ਤਾਂ ਆਪੀ ਆਈ ਜਾਂ ਹਾਂ ਇਹ ਗਾਲਕ ਵੀਰ ਨੇ ਕਹੀ ਸੀ ਸਰਵ ਰੂਪੀ ਰਾਮ ਸਰੂਪੀ ਰਾਮ ਦਾ ਸਰਵ ਉਹਦਾ ਦਲਸ਼ਾ ਸਾਇਆ ਰੂਪੀ ਸਾਦਾ ਸਾਤਾ ਛਾਉਂਿਆ ਪੱਤਾ ਪੱਤਾ ਨੀ ਤੋੜਦਾ ਇਹ ਜੇ ਦਸ ਲੰਦਾ ਬੇਸਤੋ ਤੋੜਨਾ ਤਾਂ ਬਜਤੋ ਰਟੂਗਾ ਛਾਉ ਦਾ ਪੱਤਾ ਤੋੜੀਆ ਬੂਗੇ ਤੇ ਉੱਥੋਂ ਕੋਈ ਨਹੀਂ ਰੋ ਸਕੋ ਉਹ ছਾਇਆ ਰੂਪੀ ਸਾਧਾ ਇਹ ਠੀਕ ਹੈ ਸਾਡੂ ਜਿਹੜੀ ਲੀਪ ਛਾਇਆ ਹੀ ਦਿੰਦੀ ਹੈ ਇਹ ਗੱਲ ਠੀਕ ਆਪਣੀ ਜਗ੍ਹਾ ਹੈ ਛਾਇਆ ਹੀ ਲੀਪ ਦਿੰਦੀ ਹੈ ਛਾਇਆ ਦਾ ਹੀ ਸੰਪਰਕ ਹੈ ਸਾਡੇ ਨਾਲ ਸੂਰਜ ਦਾ ਸੰਪਰਕ ਦਰਸਤ ਨਾਲ ਉਹ ਵਸੇਵਤ ਜਿਹੜੀ ਸੂਰਜ ਕਰ ਰਿਹਾ ਉਹਨੂੰ ਦਰਸਤ ਪਿੱਛੇ ਰੋਕੀ ਖੜਾ ਹੋਈ ਅਸਰ ਦਾ ਦਰਖਦੀਓ ਗੱਲ ਆ ਸਾਇਆ ਦਾ ਹੇਲਾ ਗੋਣਾ ਉਹ ਦਰਖਦ ਵਿੱਚ ਜਿਹਦੀ ਸੋਪਾ ਦਾ ਦਰਖਦ ਵਿੱਚ ਐਸਾ ਆਇਆ ਗੋਣਾ ਮੇਰਾ ਕਹਿਣਾ ਨੇਲੇ ਦੀ ਗੱਲ ਆ ਆਗਾ ਲਖਵੀ ਵੀ ਰਿੜਿਓ ਤੇ ਕਈਆ ਬਾਦ ਨੂੰ ਸ਼ਾਨਾ ਉਹ ਹੁਣ ਤੋਲ ਸ਼ਲੋਕ ਹੁਣ ਖਾਦ ਦੇ ਵਿੱਚ ਨੇ ਤਕਵੀਰ ਦੇ ਆਪਾਂ ਸਾਇਆ ਦਰਖਦ ਨੂੰ ਸਮਝਾਤੀ ਗੱਲ ਸਾਹ ਰੂਪੇ ਸਾਦ ਬਹੁਤ ਵਾਰ ਗੱਲ ਕੀਤੀ ਐ ਸਾਦੀ ਦਾ ਚੜ੍ਹਦੀ ਬੰਲੀ ਉਹ ਨਹੀਂ ਮੈਂਦਾ ਪਰ ਆ ਗੱਲ ਜਿਹੜੀ ਸੀ ਅੱਜ ਆਈ ਐ ਇੱਥੇ ਆ ਕੇ ਗੱਲ ਰਬ ਸਾਦ ਕੀ ਸਾਦ ਕੀ ਜ਼ੋਬਾ ਰੂਪ ਪ੍ਰਭ ਰੰਗ ਪ੍ਰਭ ਹਯਤ ਅੰਦਰਾਲਾ